ਪਈ ਜੇ ਕਿਸੇ ਦੇ ਕੋਈ ਖਿਲਾਫ ਗੱਲ ਨਿਕਲ ਜੀ कोई ਕੋਈ ਪੈਸੇ ਵਿੱਚ ਘਾਟਾ ਵਾਧਾ ਹੋ ਜਾਏਗਾ ਕਮਾਈ ਇਹ ਭਰਕਣਾ ਪੈ ਜਾਏ ਇਹ ਵੀ ਮੁੱਖ ਹੁੰਦਾ ਬਹੁਤੇ ਤੇ ਕਥਾਕਾਰ ਆਉਂਦੇ ਹੀ ਬਾਰ ਇਸ ਵਾਸਤੇ ਨੇ ਪਈ ਕਿਹੜੇ ਮੁਲਕ ਚ ਜਾਈਏ ਤੇ ਉੱਥੇ ਸੌਦਾ ਮਹਿੰਗਾ ਵਿਕੇ ਤੇ ਉੱਥੋਂ ਸਸਤਾ ਸੌਦਾ ਖਰੀਦ ਕੇ ਇੱਥੇ ਲੈ ਆਈਏ ਪਾਖੇ ਹੁੰਦਾ ਸਤਗੁਰਾਂ ਨੇ ਕਹਿੰਦੇ ਨੇ ਜੋ ਜਾਣੇ ਹਉ ਭਗਤ ਗਿਆਨੀ ਅੱਗੇ ਠਾਕਰ ਤਿਲ ਨਹੀਂ ਮੰਨੀ ਜੋ ਜਾਣੇ ਹਉ ਕਥਨੀ ਕਰਤਾ ਵਪਾਰੀ ਬਸੁਧਾ ਜਿਉ ਫਿਰਤਾ ਸੱਚ ਰੂਪਾ ਆਪਸਾ ਕਹਿੰਦੇ ਜਿਹੜਾ ਇਹ ਬੰਦਾ ਨਾ ਭਈ ਮੈਂ ਕਥਾਕਾਰ ਹਾਂ ਮੈਂ ਗਿਆਨੀ ਹੁਨਾ ਮੈਂ ਜਥੇਦਾਰ ਹਾਂ ਮੈਂ ਰਾਗੀ ਹਾਂ ਮੈਂ ਢਾਡੀ ਹਾਂ ਮੈਂ ਕੀਰਤਨੀਆ ਹਾਂ ਇਤਿਹਾਦਕ ਜੇ ਐਸਾ ਹੈ ਤੇ ਫਿਰ ਬੰਦਾ ਇਹ ਕਥਾਕਾਰ ਨਹੀਂ ਇਹ ਕੋਈ ਵਪਾਰੀ ਜਾਪਦਾ व्यापारी बसुदा ज्यों फिरता जिस तरह धरती ते कोई व्यापारी तुरिया फिरद इस तरह हो जाएगा क्योंकि प्रतीत नहीं बन, बनी अंदर मैं अर्ज कर रहा सा ऐसे कथाकार बहुत फिर रहे ने पर थाय साखी महापुरुष बोल दे सांझी सकल जहान है पर अगली तुख विच कहंदे ने जिन को मन की प्रतीत नाहीं जिन को मन की प्रतीत नाहीं ਸੇ ਕਿਆ ਕਥੇ ਗਿਆਨ ਹੈ ਜਿਨ੍ਹਾਂ ਦੇ ਮਨ ਵਿੱਚ ਪ੍ਰਤੀਤ ਨਹੀਂ ਆਈ ਉਹਨਾਂ ਦਾ ਗਿਆਨ ਇਸ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਫੋਕੇ ਕਾਰਤੂਸ ਹੁੰਦੇ ਐਸਾ ਗਿਆਨ ਹੋਵੇਗਾ ਉਸ ਗਿਆਨ ਦਾ ਅਸਰ ਨਹੀਂ ਹੋਇਆ ਉਸ ਗਿਆਨ ਦਾ ਲਾਭ ਕੋਈ ਨਹੀਂ ਹੋਏਗਾ ਦੁਨੀਆ ਨੂੰ ਸੰਸਾਰ ਨੂੰ ਕਿਉਂਕਿ ਆਪ ਠੀਕ ਨਹੀਂ ਉਹ ਆਪਣੇ ਅੰਦਰ ਪ੍ਰਤੀਤ ਨਹੀਂ ਬਣੀ ਬਿਨਾ ਪ੍ਰਤੀਤ ਤੋਂ ਕੋਈ ਵੀ ਕਰਮ ਕੀਤਾ ਜਾਏ ਉਹ ਨਿਸਫਲ ਕਿ ਸਰੇ ਪੁੱਛਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਹ ਜਿਹੜੇ ਕਥਾਕਾਰ ਲੋਕ ਨੇ ਇਹ ਜਿਹੜੇ ਕੀਰਤਨੀਏ ਲੋਕ ਨੇ ਇਹ ਕਥਾ ਵੀ ਕਰਦੇ ਨੇ ਬਾਣੀ ਵੀ ਪੜ੍ਹਦੇ ਨੇ ਫਿਰ ਇਹਨਾਂ ਦੇ ਅੰਦਰ ਪ੍ਰਤੀਤ ਕਿਉਂ ਨਹੀਂ ਬਣਦੀ ਸਤਗੁਰਾਂ ਨੇ ਇਹਦਾ ਕਾਰਨ ਦੱਸਿਆ ਕਹਿੰਦੇ ਨੇ ਪ੍ਰਤੀਤ ਇਸ ਵਾਸਤੇ ਨਹੀਂ ਬਣੀ ਕਿ ਜਦੋਂ ਕਿਸੇ ਕਥਾਕਾਰ ਦੇ ਮਨ ਦੇ ਅੰਦਰ ਹਉਮੈ ਦੀ ਮੈਲ ਆ ਜਾਏਗੀ ਨਾ ਜਿੱਥੇ ਵੀ ਆ ਗਈ ਕਿ ਮੈਂ ਗਿਆਨੀ ਆ ਹਮ ਬੱਡ ਕਾਬਕੁਲੀ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਹੈ ਨਾਸੀ ਜਦੋਂ ਕਿਤੇ ਐਸੀ ਗੱਲ ਆ ਗਈ ਅੰਦਰ ਹਿਰਦੇ ਵਿੱਚ ਕਿ ਮੈਂ ਕਥਾਕਾਰ ਹੁਨਾ ਪਾਤਸ਼ਾਹ ਕਹਿੰਦੇ ਨੇ ਉਦੋਂ ਹਮੈ ਦੀ ਮੈਲ ਆ ਜਾਂਦੀ ਹੈ ਤੇ ਅਗਿਆਨਤਾ ਵੱਧ ਜਾਂਦੀ ਹੈ ਤੇ ਗੁਰੂ ਤੋਂ ਪ੍ਰਤੀਤ ਟੁੱਟ ਜਾਂਦੀ ਹੈ ਪਾਤਸ਼ਾਹ ਕਹਿੰਦੇ ਨੇ ਅੰਤਰ ਅਗਿਆਨ ਭਈ ਮਤ ਮਦਮ ਸਤਗੁਰ ਪੈ ਪ੍ਰਤੀਤ ਨਹੀਂ ਅਗਿਆਨਤਾ ਵੱਧ ਗਈ ਹਉ ਮੈਂ ਦੀ ਬੈਲ ਕਰਕੇ ਅਗਿਆਨਤਾ ਵੱਧ ਗਈ ਤੇ ਮਤਮ ਲੀਨ ਹੋ ਗਏ ਮਤਮ ਲੀਨ ਤੋਂ ਸਤਗੁਰੂ ਤੋਂ ਪ੍ਰਤੀਤ ਟੁੱਟ ਗਈ ਇਸ ਵਾਸਤੇ ਇਹ ਕਥਾਕਾਰ ਇਸ ਵਾਸਤੇ ਕਾਮਯਾਬੀ ਹੋ ਸਕਿਆ ਸਤਗੁਰਾਂ ਦਾ ਇਹਨਾਂ ਸ਼੍ਰੇਣੀਆਂ ਦੇ ਉੱਤੇ ਬੜੇ ਬੜੇ ਵੱਡੇ ਕਟਾਕਸ਼ ਨੇ ਜਿਹੜੇ ਅੰਦਰੋਂ ਹੋਰ ਤੇ ਬਾਹਰੋਂ ਹੋਰ ਨੇ ਜਿਨ੍ਹਾਂ ਦੇ ਬਿਨਾ ਪ੍ਰਤੀਤ ਤੋਂ ਕੋਈ ਗੱਲਾਂ ਕਰੀ ਜਾਣੀਆਂ ਗੁਰਬਾਣੀ ਬਹੁਤ ਖਰਾਫ ਹੈ ਨਵੀ ਮੈਂ ਅਰਜ ਕਰਾਂ ਅੱਗੇ ਚੱਲੀਏ ਕਿਸੇ ਨੇ ਵੇਖਿਆ ਕਿਸੇ ਕਵੀ ਨੇ ਉਹ ਆਪਣਾ ਵਿਚਾਰ ਪ੍ਰਗਟ ਕੀਤਾ ਉਹ ਕਹਿੰਦਾ ਮੈਂ ਦੁਨੀਆ ਵਿੱਚ ਵੇਖੇ ਨੇ ਕਰਮ ਕਰਦੇ ਲੋਕੀ ਕੋਈ ਤੇ ਮੱਕੇ ਦਾ ਹਜਜ ਕਰ ਰਿਹਾ ਕੋਈ ਤੀਰਥ ਯਾਤਰਾ ਕਰਦਾ ਪਿਆ ਕੋਈ ਅਖੰਡ ਪਾਠ ਕਰਦਾ ਕੋਈ ਪੂਜਾ ਪਾਠ ਕਰਦਾ ਕੋਈ ਯਗ ਹਵਨ ਕਰਦਾ ਕੋਈ ਹੋਰ ਕਈ ਕਿਸਮ ਦੇ ਕਰਮ ਦੁਨੀਆ ਵਿੱਚ ਮੁੱਕਦੇ ਨਹੀਂ ਕਿੰਨੇ ਕਰਮ ਨੇ ਉਹ ਕਹਿੰਦਾ ਜਿੰਨੇ ਵੀ ਕਰਮ ਨੇ ਇਹ ਹੈ ਤੇ ਨੇ ਪਰਮੇਸ਼ਰ ਦੇ ਨੇੜੇ ਹੋਣ ਵਾਸਤੇ ਪਰ ਜੇ ਕਿਤੇ ਪ੍ਰਤੀਤ ਤੋਂ ਬਿਨਾ ਇਹ ਕਰਮ ਕੀਤੇ ਜਾਣ ਤੇ ਫਿਰ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਉਹਨਾਂ ਨੂੰ ਇਹ ਕਵੀ ਜਿਹੜਾ ਇਹ ਐਉਂ ਜਾਪਦਾ ਜਿਸ ਤਰ੍ਹਾਂ ਇਹ ਸੰਸਕ੍ਰਿਤ ਦਾ ਕਵੀ ਹੈ ਤੇ ਇਸ ਨੇ ਹਿੰਦੀ ਸ਼ਬਦਾਂ ਵਿੱਚ ਇੱਕ ਕਵਿਤ ਲਿਖੀ ਹੈ ਬਹੁਤ ਬਰੀਕ ਹੈ ਇਹ ਕਹਿੰਦਾ ਕਥਾ में ना कंथा में ना ਤੀਰਥ ਕੇ पंथा में ना ਪੋਥੀ में ना ਪਾਥ ਮੇ ना ਸਾਥ ਕੀ बसीत ਮੇ ਜਟਾ ਮੇ ना मुंडन तिलक त्रिकुंडन में नदी कूप कुंडन अनन दान रीत में पाठ मठ मंडल ना कुंडल क मंडल में माया देह में ना देव देव रामसीत में आप ही अपार पारवार प्रभु पूर रहो पर पाईए प्रकट परमेश्वर प्रतीत में परमेश्वर दी प्राप्ति जे करनी है ਤੇ ਸਤਗੁਰੂ ਤੇ ਪ੍ਰਤੀਤ ਹੋਵੇਗੀ ਪਹਿਲਾ ਜੇ ਜੇ ਪ੍ਰਤੀਤ ਨਹੀਂ ਆਈ ਤੇ ਪ੍ਰਾਪਤੀ ਕੋਈ ਨਹੀਂ ਹੋ ਸਕਦੀ ਇਹ ਗੱਲ ਭੁੱਲ ਜਣ ਇਹ ਲੋਕ ਗੁਰਬਾਣੀ ਸਾਡੇ ਨਾਲ ਅਸੀਂ ਗੁਰਬਾਣੀ ਦੇ ਵਿਚਾਰ ਕਰ ਲੈਂਦੇ ਆ